ਸੰਗੀਤ ਦੇ ਬਹੁਤ ਹੀ ਗਿਆਨੀ اور ਬਹੁਤ ਹੀ ਵਿਦਵਾਨ ਸਨ ਮੇਰੇ ਖਿਆਲ ਆਪ ਸਾਰਿਆਂ ਨੇ ਟੇਪ ਦੇ ਵਿੱਚ ਰਿਕਾਰਡਿੰਗ ਦੇ ਵਿੱਚ ਸੁਣਿਆ ਵੀ ਹੋਏਗਾ ਸੱਚੇ ਪਾਸ਼ਾ ਇਸ ਤਰ੍ਹਾਂ ਕਹਿੰਦੇ ਨੇ ਕਿ ਜਦੋਂ ਦਰਿਆ ਵਗਦਾ ਜਾਂਦਾ ਪਾਣੀ ਦਾ ਤੇ ਉਹ ਚੋਂ ਇੱਕ ਗੜਵਾ ਖੜ ਲਈ ਹੈ ਨਾ ਕਿ ਉਹ ਸਾਡੇ ਕੋਲ ਇੰਨਾ ਕੀ ਸੰਗੀਤ ਹੈ ਤੇ ਬਾਕੀ ਦਾ ਸਾਰਾ ਵਗਦਾ ਜਾਂਦਾ ਇੰਨਾ ਸੰਗੀਤ ਦਾ ਜਾਨੀ ਉਹਨਾਂ ਨੇ ਮਹੱਤਵ ਦੱਸਿਆ ਕਿ ਕਿੰਨਾ ਕੁ ਸੰਗੀਤ ਹੈ ਦੁਨੀਆ ਵਿੱਚ ਤੇ ਜੇ ਸਾਡੇ ਕੋਲ ਇੰਨਾ ਹੈਗਾ ਤੇ ਬਾਕੀ ਕਿੰਨਾ ਹੋਏਗਾ ਕਿ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਸੰਗੀਤ ਕਿੰਡੀ ਵੱਡੀ ਚੀਜ਼ ਹੈ ਸੋ ਉਹਨਾਂ ਦੀ ਕਿਰਪਾ ਬਹੁਤ ਹੋਈ ਹੈ ਸਾਡੇ ਤੇ ਨਾਮਤਾਰੀ ਸੰਗਤ ਤੇ ਉਸ ਤੋਂ ਬਾਅਦ ਹੁਣ ਸਤਗੁਰੂ ਜਗਜੀਤ ਸਿੰਘ ਜੀ ਅਤਿਅੰਤ ਕਿਰਪਾ ਕਰ ਰਹੇ ਨੇ ਸਭ ਤੋਂ ਪਹਿਲਾਂ ਮੈਂ ਇਸ ਤਰ੍ਹਾਂ ਆਖਾਂਗਾ ਕਿ ਜੇ ਜਿਹੜੇ ਕਾਰਕਮਨ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ ਸਾਡੇ ਪੂਜਨੀਏ ਸੰਤ ਖਜਾਨ ਸਿੰਘ ਜੀ ਜੋ ਦੋਹੋ ਦੋਨੋਂ ਸਤਗੁਰਾਂ ਦੇ ਜਿਨ੍ਹਾਂ ਨੇ ਉਹਨਾਂ ਦੀ ਹਾਜ਼ਰੀ ਭਰੀ ਹੈ ਔਰ ਆਪਣਾ ਪਰਿਵਾਰ ਛੱਡ ਕੇ ਦੇਸ਼ ਵਿਦੇਸ਼ਾਂ ਵਿੱਚ ਸੱਚੇ ਪਾਤਸ਼ਾਹ ਦੀ ਆਗਿਆ ਦੇ ਨਾਲ ਜਿੱਥੇ ਵੀ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਉੱਥੇ ਉਹਨਾਂ ਦੇ ਨਾਲ ਜਾ ਕੇ ਸਾਨੂੰ ਸੰਗਤਾਂ ਨੂੰ ਸੰਗੀਤ ਆਪਣਾ ਸੁਣਾਇਆ ਹੈ ਉਹਨਾਂ ਦੀ ਯਾਦ ਵਿੱਚ ਅਸੀਂ ਇਹ ਛੋਟਾ ਜਿਹਾ ਆਪਣਾ ਹਿੱਸਾ ਪਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਮੈਂ ਸਤਿਗੁਰੂ ਜੀ ਦੇ ਥਾਪੇ ਹੋਏ ਉਸਤਾਦ ਜੀ ਸੰਤ ਹਰਪ੍ਰੀਤ ਸਿੰਘ ਜੀ ਜੋ ਆਪ ਜੀ ਨੂੰ ਪਤਾ ਹੀ ਹੈ ਕਿ ਬੜੇ ਹੀ ਉੱਚ ਕੋਟੀ ਦੇ ਸੰਗੀਤਕਾਰ ਹਨ ਔਰ ਬੱਚਿਆਂ ਨੂੰ ਸਖਾਲਦੇ ਵੀ ਹਨ ਉਹਨਾਂ ਕੋਲੋਂ ਮੈਂ ਬੇਨਤੀ ਕਰਾਂਗਾ ਕਿ ਆਪ ਜੀ ਸਟੇਜ ਤੇ ਆਓ ਆਪ ਜੀ ਕੀਰਤਨ ਦੁਆਰਾ ਸਾਧ ਨੂੰ ਨਿਹਾਲ ਕਰੋ ਲੇਕਿਨ ਮੈਂ ਇਹ ਜਰੂਰ ਆਖਾਂਗਾ ਆਪ ਜੀ ਨੂੰ ਕਿ ਉਹ ਕੀਰਤਨ ਦੇ ਅੰਤ ਵਿੱਚ ਤਕਰੀਰ ਨੂੰ 5 ਮਿੰਟ ਜੇ ਤੁਸੀਂ ਅਲਾਉ ਕਰਕੇ ਤੇ ਸੰਤ ਖਜਾਨ ਸਿੰਘ ਜੀ ਬਾਰੇ ਸਾਧ ਨੂੰ ਦਰਸਾ ਸਕੋ ਸੰਤ ਜੀ ਬਾਰੇ ਕਿਉਂਕਿ ਆਪ ਜੀ ਨੇ ਉਹਨਾਂ ਦੇ ਦਰਸ਼ਨ ਮੇਰੇ ਨਾਲ ਨੇੜੇ ਕੀਤੇ ਹੋਏ ਹਨ ਤੇ ਆਪ ਜੀ ਕੁਝ ਜ਼ਿਆਦਾ ਜ਼ਿਆਦਾ ਜਾਣਦੇ ਹੋ ਨਾ ਬਾਰੇ ਤੇ ਜਰੂਰ ਦੱਸਣ ਦੀ ਕਿਰਪਾਲਤਾ ਕਰਨੀ ਇਹਨਾਂ ਦੇ ਨਾਲ ਸੰਤ ਨਿਰੰਦਰਪਾਲ ਸਿੰਘ ਜੀ ਤਵਲੇ ਤੇ ਆਉਣਗੇ ਤੇ ਜੇ ਸਾਡੇ ਸੰਤ ਸਤਵਿੰਦਰ ਸਿੰਘ ਜੀ ਆ ਜਾਣ ਉਹ ਵੀ ਆਪ ਜੀ ਦੇ ਨਾਲ ਬੈਠਣਗੇ ਸੰਤ ਰਣਪਾਲ ਸਿੰਘ ਜੀ ਤੁਸੀਂ ਵੀ ਤਵਲੇ ਤੇ ਆ ਕੇ ਕਿਰਪਾ ਕਰੋ